ਸ਼ਲੋਕ ਦੋਹਾ ਮਹੱਲਾ ਪੰਜਵਾਂ ਇੱਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜੀਉ ਹਮਾਰਾ ਖੰਨੀਐ ਹਰ ਮਨ ਤਨ ਸੰਦੜੀ ਵਤ ਪਰ ਜਿਹੜਾ ਮੈਂ ਸੱਜਣ ਬੁਲਾਇਆ ਉਹਦੇ ਜਿੱ ਕੀ ਗੁਣ ਕੀ ਐ ਅੱਗੇ ਗੁਣ ਦੱਸੇ ਇੱਕ ਜੋ ਸਾਜਨ ਬੇਕੀਆ ਸਰਬ ਕਲਾ ਸਤਦਸ ਗੁਣ ਉਹ ਇਹ ਸਾਰੇ ਗੁਣ ਹੁਣ ਨਹੀਂ ਦੀ ਕੋਈ ਉਹ ਇੱਕ ਕੋਈ ਆਪਣਾ ਨਹੀਂ ਦੀ ਸਾਰੇ ਗੁਣ ਗੋਣ ਜਿਹੜਾ ਗੁਣ ਹਰ ਕੰਮ ਕਰ ਸਕਦਾ ਠੀਕ ਹੈ ਕਲਾ ਕਲਾ ਗੁਣਾ ਹੁੰਦਾ ਫਲਾਣ ਦੇ ਜਿਆ ਕਲਾ ਉਹ ਗੁਣਾ ਹਾਂਜੀ ਗੁਬਰਤ ਦੇ ਵਿੱਚ ਐ ਨਹੀਂ ਹੈ ਵੀ ਆਦਾ ਦੂਰਾ ਗੋਣ ਇਹ ਕਦੀ ਹੋਦਾ ਨਹੀਂ ਨਾ ਕਦੀ ਕਿਤੇ ਹੋਤੇ ਕਰਾ ਲਈ ਜੀਓ ਹਮਾਰਾ ਮਨ ਤਨ ਸੰਦਲੀ ਕੀਤਾ ਵਿਰਾਜ ਜੀ ਜਿਹੜਾ ਮਨ세 ਨਾ ਇਹ ਘੜਤਾ ਖਦੀਏ ਹਰ ਮਨ ਤਨ ਸੁਦਲੀ ਵਤ ਐਨ ਕਰਨਾ ਗਿਆ ਚੀਜ਼ ਹੈ ਰੰਗ ਕੇ ਜੀ ਬਣਾਇਆ ਇਹ ਤਾਂ ਚਿੱਤ ਵਿੱਚੋਂ ਹੀ ਪੈਦਾ ਹੋਇਆ ਹੈ ਉਹਦਾ ਦੇਵਤਾ ਉਹ ਰਾਖੇ ਐਜਾ ਘੜਕੇ ਬਣਾਇਆ ਸਵਾਜਯਾ ਹੁੰਦਾ ਇਹ ਤਾਂ ਇਹਦਾ ਹੀ ਟੁਕੜਾ ਜਿੱਤ ਲਈ ਆ ਇਹਦੇ ਵਿੱਚੋਂ ਅੱਡ ਹੋਈ ਹੋਈ ਵਸੂ ਹੈ ਇਹੋ ਜਾਂ ਜੀਉ ਪ੍ਰੀਤਮ ਨੇ ਬਣਾਤਾ ਜਿਹੜਾ ਪ੍ਰੀਤਮ ਬਣਾਇਆ ਇਹਨੂੰ ਸੱਜਣਾ ਬਣਾਇਆ ਐਸਾ ਹੱਥ ਫੇਰੇ ਆ ਉੱਤੇ ਕਾਇਆ ਪੜਤੀ ਥਾਰੀ ਕਾਇਆ ਪਰਟ ਕੇ ਅਹਜਾ ਬਿਲਕੁਲ ਕਹੋਤਾ ਕਿ ਤਰੋਂ ਦੇ ਚ ਮਹੱਲਾ ਪੰਜਵਾਂ ਮੂਲ ਹਰ ਛੋਡਣ ਸੇ ਦੁਰਜਣਾ ਪੜੈ ਦੋਜਕ ਕੈ ਸੂਲ ਜੇ ਕਰ ਕਹੇ ਪਿਆੜੇ হে ਮੇਰੀ ਬਾਹ ਫੜ ਲਵੇ ਬੰਤਾ ਮੇਰਾ ਅਹਜਾ ਬੁਨਾਸਤਾ ਅੱਛਾ ਜੀ ਸੱਜਣਾ ਬਣਾਇਆ ਸੀ ਨਾ ਤੈਨੂੰ ਤੇ ਤੂੰ ਕਿਹਾ ਸੀ ਵੀ ਆ ਮੇਰਾ ਕੰਮ ਕਰਦੇ ਤੈਂ ਕਰਤਾ ਉਹ ਦਰ ਜਦਾ ਹਰਤਾ ਜੇ ਤੂੰ ਮੈਨੂੰ ਬਾਪ ਔੜ ਲਵੇ ਤੇ ਤੂੰ ਆਪਣੀ ਬਣਾ ਲਵੇ ਉਹ ਵੇ ਬੇਬੂ ਬੁੱਧੀ ਕਹਿੰਦੀ ਐ ਬਾ ਤੇਰੀ ਖਲਾਬਤ ਕੀਤੀ ਐ ਝੂਠੜ ਰਹੀਆਂ ਹੁਣ ਤੱਕ ਤੋਹਾਡਣ ਹੁਣ ਤੂੰ ਮੈਨੂੰ ਅਪਣਾ ਲਵੇ ਕੀਆ ਉਰ ਹੋਇਆ ਕਿ ਜਲ ਗੱਲ ਦਾ ਮਾਂਦੀ ਖਬਰਾਂ ਬਣਾਵੇ ਖਬਰਾਂ ਦਾ ਆਪਣਾ ਰਾਜਗੀਰ ਤੇ ਕੋਈ ਸ਼ਰਤ ਲਾ ਦੇ ਜੇ ਕਰ ਗਾਹੇ ਪਿਆਰੜੇ ਮੂਲ ਤਦਨ ਤੇਰੇ ਚਰਨ ਵੀ ਛੱਡ ਸਕਦੀ ਮੂਲ ਦਾ ਮਗਰ ਵੀ ਤੇਰੇ ਨਾਲ ਐਸੇ ਹੁਣ ਤੇਰੇ ਚਲਦੀ ਛੱਡਦੀ ਪਹਿਲਾਂ ਤਾਂ ਗੱਤੀ ਕਰਨੀ ਇਹ ਗੱਲ ਪਹਿਲਾਂ ਤਾਂ ਕੰਦੇ ਗਲਤੀ ਐ ਇਹਨੂੰ ਬੋਲ ਲਿਆ ਜਿਹੜਾ ਬਗਨਾ ਸੀ ਨਾ ਛੋਟਾ ਇਹਨੂੰ ਵੱਡਾ ਮੰਨ ਲਿਆ ਤਾਂ ਮਰ ਕੀਤਾ ਸੰਤ ਪੂਰ ਪਤਾ ਲੱਗਿਆ ਜਦੋਂ ਇਹ ਪੂਰਾ ਦੁਭੀ ਕਰਤਾ ਜਦ ਪਤਾ ਲੱਗਿਆ ਸਾਰੇ ਦੇਖ ਕੇ ਫਿਰ ਪਤਾ ਲੱਗਿਆ ਇਤਿਆਂ ਸਾਰੀਆਂ ਨੂੰ ਪਤਾ ਲੱਗਿਆ ਇਹ ਹਰ ਛੋੜਨ ਸੇ ਦੁਰਜਣਾ ਪੜੇ ਦੋਜਕ ਕੇ ਜਿਹੜੇ ਹੰਭੂ ਐਸੇ ਹੰਭੂ ਜਦੋਂ ਐਸਾ ਹੰਭੂ ਬੁਦਕੇ ਤੇ ਕਿਹ ਕਾਹੇ ਜਾਗਾਏ ਜਿਹੜੇ ਐਸੇ ਹੰਭੂ ਛੱਡ ਦਦੇ ਨੇ ਦੁਰਜਤ ਦੇ ਨਾ ਦੁਰਜਤ ਦੀ ਡੈਫੀਨੇਸ਼ਨ ਆ ਕਿ ਛੋਟਣ ਤੇ ਦੁਰਜਨ ਦੁਰਜਤ ਉਹ ਨਹੀਂ ਨਹੀਂ ਯਾਰਾਂ ਚਾਹਦੇ ਸੱਚ ਦੇ ਸੱਚ ਤੋਂ ਧੋਰੀ ਬਣਾ ਕੇ ਰੱਖਣੀ ਚਾਹੁੰਦੇ ਨੇ ਇਹ ਬਖਰਜੋ ਵਾਲ ਬੰਦੂ ਸਾਰੇ ਬਾਹਰ ਨਿਕਲ ਜਾਣੇ ਨੇ ਜਿਹੜੇ ਆਪਣੇ ਆਪ ਨੂੰ ਪ੍ਰਚਾਰਕ ਸਮਝਦੇ ਨੇ ਜੇ ਤਾਂ ਹਰ ਜੱਗਾਂ ਕੇ ਦੁਰਜਨ ਨੇ ਕਾਲਾ ਹੁੰਦਾ ਐ ਅੱਡ ਦਿਖੂਗਾ ਚਿੱਟਾ ਹੁੰਦਾ ਜਦ ਆ ਕੋਈ ਮੱਖਣ ਦੇ ਵਿੱਚੋਂ ਬਾਹਰ ਦੇ ਗਿਆ ਤਾਂ ਕਾਲਾ ਹੁੰਦਾ ਉਹ ਤੇ ਵੀ ਕਿਹੜਾ ਸਾਰੇ ਲੋਕਿਆ ਹੋਗੇ ਠੀਕ ਹੈ ਫਰਜ਼ ਉਹ ਫਰਜ਼ ਛੋੜਨ ਤੇ ਦੁਰਜਦੋ ਦੁਰਜਦੋ ਜਿਹੜੇ ਹੱਥ ਫੜ ਦਿੰਦੇ ਪੜਾ ਦੋਜਕ ਕੈ ਸੂ ਆ ਫਿਰ ਦੋਜਕ ਬੜਾ ਫਰੇਜ਼ ਉਹ ਕਹਿੰਦਾ ਜੱਡੇ ਚੁੰਦੇ ਰਹੇ ਨੰਦਰ ਖੇਲਦੇ ਰਹੇ ਗੋਲ ਕਾ ਰਹਿਣ ਤੇ ਅਸੀਂ ਵਿੱਚੇ ਛੱਡਦੀ ਰਹੀ ਉਹਨਾਂ ਦੀ ਅਰਦਾਸ ਵੀ ਹੈਗੀ ਉਹ ਤੋਂ ਜੀ ਹਾਂਜੀ ਪੌੜੀ सबनिधान कर जिस दे हर करे सो होवे जप जप जीवै संत जन पापं मल तोवे इधर का सारे निदान होलू सारे ख्याते होलू गुण वाला दाता सबनिधान अनंत कर जिस दे हर करे सो होवे हर करे तूफान ओ हर करे सो होवे जो करता ਉਹ ਦਾਤ ਨੂੰ ਕੋਈ ਛੱਡ। ਉਹ ਤੋਂ ਫੇਰ ਮਾਣੇ ਕਰ ਜੀਵੇ ਨੇ। ਠੀਕ ਹੈ। ਉਹ ਫੂੜ-ਫੋੜ ਕੌਣ ਹੈ? ਜੱਪ-ਜੱਪ ਜੀਵੇ ਹੈ। ਸੰਤ ਜਨ ਪਾਪਾਂ ਮਲ ਖੋਬੇ। ਉਹਨੂੰ ਜੱਪ ਕੇ ਸੰਤ ਜਨ ਸਤਿ ਜੀਵਨ ਦੀ ਪ੍ਰਾਪਤੀ ਕਰਦੇ ਜੀ। ਠੀਕ ਹੈ। ਜੱਪ-ਜੱਪ ਜਨ ਪਾਪਾਂ ਮਲ ਖੋਬੇ। ਪਾਪਾਂ ਦੀ ਜਿਹੜੀ ਮਾਇ ਹੈ ਤੇ ਉਹਨੂੰ ਖੋਦਦੇ ਪਾਪਾਂ ਦੀ ਮਾਇ ਕਿ ਹੁੰਦੀ ਹੈ ਸੱਚ ਦਾ ਵਿਰੋਧ ਕਰਨ ਪਾਪਾਂ ਮਲਤੋ ਮੈਂ ਢੋਲ ਇਦਰੇ ਮਤਲਬ ਹੈ ਛੱਡ ਦਿੰਦੇ ਨੇ ਆਪਣਾ ਸੁਭਾਅ ਛੱਡ ਦਿੰਦੇ ਨੇ ਠੀਕ ਹੈ ਆਪਣਾ ਸੁਭਾਅ ਪਾਪਾਂ ਦੀ ਮਾਇ ਦਾ ਭਰਿਆ ਹੋਇਆ ਆਪਣੀ ਮਰਜ਼ੀ ਉਹ ਛੱਡ ਦਿੰਦੇ ਜੀ ਉਹਦੇ ਅਨੁਸਾਰੀ ਉਹਦੇ ਹੁਕਮ ਜੇ ਹੋ ਜਾਂਦੇ ਨੇ ਕਰਨ ਕਮਲ ਹਿਰਦੇ ਵਸੈ ਸੰਕਟ ਸਭ ਖੋਵੇ ਗੁਰਪੂਰਾ जिस ਭੇਟਿਆ मर जनम ना ਰੋਵੇ ਉਹਨਾਂ ਸਾਧਕਾਂ ਦੇ ਚਰਨ ਸਭ ਦੇ ਹਿਲਦੇ ਜਿ ਵਸ ਜਦ ਦੇ ਨੇ ਸੰਕਟ ਜਿੰਨੇ ਨੇ ਸਭ ਖੋਵਣ ਸਾਰੇ ਸੰਕਟ ਦੂਰ ਹੋ ਜਾਂਦੇ ਨੇ ਗੁਰਪੂਰਾ ਜਿਸ ਭੇਟਿਆ ਮਰ ਜਨਮ ਨਾ ਰੋਵੇ ਨਾ ਵਰਦੇ ਨੇ ਬੰਨ ਵੇਲੇ ਰੋਦੇ ਮਰ ਕੇ ਜੰਪਦੇ ਨੇ ਪਰ ਰੋਦੇ ਨਹੀਂ ਪਤਾ ਨਹੀਂ ਲੱਗਦਾ ਕਦ ਮਰਦੇ ਨੇ ਉਹਨਾਂ ਦਾ ਉਹ ਜਿਉਂਦੇ ਹੀ ਮਰ ਲੈਂਦੇ ਨੇ ਕਿਉਂਕਿ ਸਰੀਰ ਸਣੇ ਮਰ ਕੇ ਜਿਉਂਦੇ ਵੀ ਹੋ ਜਾਂਦੇ ਨੇ ਉਹ ਰੋਦਾ ਹੀ ਨਹੀਂ ਫਿਰ ਉਹਨਾਂ ਨੂੰ ਕੋਈ ਪ੍ਰੋਕੋਡਾਸ ਕਹਿੰਦਾ ਮਤਮੇ ਪਿੱਛੇ ਕੋਈ ਰੋਗ ਸੀ ਸੋਗੇ ਨੂੰ ਨਾ ਪਾਇਆ ਠੀਕ ਹੈ ਜੀ ਉਹ ਮਰ ਕੇ ਜਿਉਂਦਾ ਹੋ ਜਾਂਦੇ ਆਪਣੇ ਘਰ ਨੂੰ ਚੱਲਿਆ ਸਰੀਰ ਦਾ ਛੱਡਣਾ ਮਰਦਾਂ ਦੀ ਹੁੰਦਾ ਕੋਈ ਗੱਲ ਇੱਥੇ ਕਹੀ ਮਰ ਮਰ ਵੀ ਚਾਰਿਆਂ ਮਰੀ ਜਨਮੀ ਨਾ ਰੋਵੇਂ ਕਹਿੰਦਾ ਭਾਪ ਜਦੋਂ ਮਨ ਮਰ ਗਿਆ ਤਾਂ ਮੌਤ ਹੋ ਮਰ ਕੇ ਜਿਉਂਦਾ ਹੋਵੇ ਉਹ ਲਸ਼ਮਣ ਮੂਰਛਾ ਹੋ ਗਿਆ ਮਰ ਗਿਆ ਜਾਂ ਹੋ ਗਿਆ ਫੇਰ ਰੋਣਾ ਕਦ ਹੈ ਪਰ ਲੱਗੀ ਮਰ ਗਿਆ ਰੋਦਾ ਪਿੰਡਦਾ ਰਿਹਾ ਜਿਉਂਦਾ ਹੋ ਗਿਆ ਫੇਰ ਰੋਣਾ ਕਦ ਸੀ ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵ ਪ੍ਰਭੂ ਦੇ ਦਰਸ਼ਨ प्यास ਪਿਆਸ है। ਹੈ ਬਹੁਤ ਪਿਆਸ ਆ ਮੈਨੂੰ ਵੀ ਪ੍ਰਭੂ ਦੇ ਦਰਸ਼ਨ ਦੀ ਖੜੀ ਕਿਰਪਾ ਕਰ ਦੇ ਵੇ ਵੀਰੇ ਤੇ ਵੀ ਜੇ ਕਿਰਪਾ ਕਰੇ ਤਾਂ ਮੈਨੂੰ ਵੀ ਦਰਸ਼ਨ ਦੇ ਦੇ ਕਿਉਂ ਦਰਸ਼ਨ ਨਾਲ ਕੀ ਹੁੰਦਾ ਮਰ ਕੇ ਜਿਉਂਦਾ ਹੋ ਜਾਂਦਾ ਮਰਿਆ ਤਰਜਨ ਦੇਖ ਜੀਵਾਂ ਪਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹ ਜਲ ਟੂੜਦਾ ਦੇਣ ਲੱਗੇ ਬਰਿਆਂ ਨੂੰ ਜਿਉਂਦਾ ਵੀ ਕਰਦੇ ਨੇ ਹੁਣ ਚੀਚੋ ਵਾਲ ਕਹਿੰਦੇ ਕੰਮ ਕਰਨ ਲੱਗਿਆ ਮੇਰਾ ਖਿਆਲ ਹੁਣ ਕੋਈ ਬਰੂਗਾ ਹੀ ਕੋਈ ਮਰਦਾ ਜਲ ਪੌਣ ਤਾਂ ਦੇਣ ਲੱਗੇ ਉੜਦਾ ਸਾਰੇ ਜਿਉਂਦੇ ਹੁਣ ਕਦਾਂ ਮਰ ਕੋਈ ਮਾਫੀ ਸੰਦਰ ਤੇ ਆ ਗਰਮਾ ਨੇ ਬੇ ਛੱਡ ਕਹਿੰਦੇ ਜੂਗਾ ਡੰਡਾ ਵਾਲੇ ਖੇਡ ਲੈਣਗੇ ਵੀ ਜਿਲ੍ਹ ਦੇ ਕਰ ਮਰੇ ਹੋਇਆਂ ਨੂੰ ਕਿ ਡਰਾਬੇ ਦੀ ਚੱਲ ਸਰਕਾਰ ਨੇ ਵੀ ਜਿਟਾਉਣਾ ਪਖੰਡਵਾਦ ਦੇ ਧਰਮ ਤੇ ਰੂਤੇ ਨੇ